ਹਾਂਜੀ ਭਗਤ ਕਬੀਰ ਜੀ ਨੇ ਘੱਗੇ ਅੱਖਰ ਤੋਂ ਉਪਦੇਸ਼ ਦਿੱਤਾ ਹੈ ਜੀ 10ਵੀਂ ਪੌੜੀ ਵਿੱਚ ਘਗਾ ਕਟਿ-ਕਟਿ ਨਿਮਸੈ ਸੋਈ ਟੱਟ ਫੂਟੇ ਕਟ ਕਬਹੈ ਨਾ ਹੋਈ ਘੰਗਾ ਘਟ ਘਟ ਨਿਮਸੈ ਸੋਈ ਜਿਹੜਾ ਹਿਰਦਾ ਹੈ ਇਹਦਾ ਨਿਰਮਾਨ ਕਰਨ ਵਾਲਾ ਜਿਹੜਾ ਹੈ ਉਹ ਹੀ ਦੇ ਵਿੱਚ ਰਹਿੰਦਾ ਹੈ ਦੇ ਬਸ ਉਹਨਾਂ ਨੇ ਨਿਰਵਾਣ ਕਰਨਾ ਕਟਕਟ ਨਿਰਵਾਣ ਅਟਾ ਦਾ ਨਿਰਵਾਣ ਕਰਨ ਵਾਲਾ ਹੀ ਹੋ ਆਪ ਹੈ ਗੋਬਿੰਦ ਨਾ ਹੋਈ ਜੇ ਕਟ ਫੁੱਟ ਜਾਂਦਾ ਤਾਂ ਮਤਲਬ ਇਹ ਨਹੀਂ ਹੈ ਉਹ ਜ ਕبھی ਆ ਗਈ ਕੁਝ ਉਹ ਜ ਕੋਈ ਕبھی ਨਹੀਂ ਆਉਂਦੀ ਉਹਦੇ ਉਹਦੀ ਸ਼ਕਤੀ 'ਚ ਕੋਈ ਕਮਲੀ ਨਹੀਂ ਹੁੰਦੀ ਜਿੰਨੀ ਸ਼ਕਤੀ ਉਹਨਾਂ ਜਿੰਨੀ ਬੁੱਧ ਉਹਦਾ ਬਲਵਾਨ ਹੋ ਗਈ ਉਹਦੀ ਬੁੱਧੀ ਤੇ ਬਲੋਂ ਨਹੀਂ ਰਹਿੰਦਾ ਸਰੀਰ ਨਹੀਂ ਰਿਹਾ ਇਹਦਾ ਮਤਲਬ ਇਹ ਨਹੀਂ ਹੈ ਵੀ ਜਿੰਨਾ ਬੁੱਧ ਵੱਲਤੀ ਉਹ ਕੋ ਘਟ ਜਾਂਦਾ ਉਹਦਾਂ ਨਹੀਂ ਘਟਿਆ ਉਹਦੇ ਨਾਲ ਸਮਾ ਘਟ ਗਿਆ ਉਹਦਾ ਉਹਨੂੰ ਹੁਕਮ ਆਇਆ ਘਟ ਪੈਦਾ ਕਰਨ ਦਾ ਘਟ ਪੈਦਾ ਕਰਨ ਦੀ ਉਹਦੀ ਜਿਹੜੀ ਸ਼ਕਤੀ ਸੀ ਉਹ ਵਾਪਸ ਹੋ ਗਈ ਸੀ ਕੱਢ ਪਾਦਾ ਕਰਨ ਦੀ ਸ਼ਕਤੀ ਮਿਲਦੀ ਹੈ ਉਹਨੂੰ ਹੁਕਮ ਨਾਲ ਤਾਂ ਜਾਨਵਰ ਲੈਂਦੇ ਉਹ ਸ਼ਕਤੀ ਉਹਨਾਂ ਨੇ ਸ਼ਕਤੀ ਕਿਹ ਜੇ ਖਿੱਚ ਲੈ ਖਿੱਚ ਤੇਜ ਜਦ ਨਾ ਬਾਹਰ ਜਾਣ ਦਾ ਹੁਕਮ ਦਿੱਤੇ ਜੰਉਂਦਰੇ ਰੱਖ ਆਪਣੇ ਨੂੰ ਫੇਰਾ ਕਲੰਦਰੇ ਦੇ ਰਹਿਦੀ ਹੁੰਦੇ ਆਪਣੇ ਬਾਹਰ ਤਾਂ ਪ੍ਰਗਟ ਹੋਊਗੀ ਜਦ ਉਹਨੂੰ ਜੱਤ ਮਿਲੂਗਾ ਕੱਢ ਫੁੱਟੇ ਕੱਢ ਕਹਵਾਣਾ ਹੋਈ ਦਾ ਮਤਲਬ ਇਹ ਹੈ ਸਰੀਰ ਤਿਆਗਣ ਤੋਂ ਬਾਅਦ ਯੇ ਬੁੱਧਿਆ ਕਟ ਨਾ ਤੇਜਾ ਦੇ ਕੋਲ ਜਿਨਾ ਗਿਆਨ ਕੜਤਾ ਨੇ। ਅਗਲੇ ਜਨ ਨੂੰ ਚੱਲਦੇ ਉੱਥੇ ਹੀ ਪੇ ਸ਼ੁਰੂ ਹੋ ਜਾਂਦਾ। ਹਾਂਜੀ। ਤਾਂ ਇਹ ਕਾਹ ਰੂਪ ਹੁੰਦੇ ਹੋਏ, ਸਰੀਰ ਦੇ ਵਿੱਚ ਹੁੰਦੇ ਹੋਏ ਜੇ ਕਿਸੇ ਨੂੰ ਘਾਟ ਪਤਾ ਲੱਗ ਜਪੇ। ਕਾਟ ਕੀ ਹੈ ਸੈਜ ਸੁਨਦ ਦਾ ਘਾਟ। ਅਸੀਂ ਛੱਡ ਕੇ ਤੇਰੀ ਕੁੜੀ ਨੂੰ ਵਿਹੜ ਘਰ ਤੇ ਜਾਣਾ ਇਹ ਘਾਟ ਹੈ ਵਿਚਾਲੇ ਵਿਚਾਲੇ ਦਾ ਹਿੱਸਾ ਘਾਟ ਹੈ ਜੇ ਕਿਸੇ ਨੂੰ ਪਤਾ ਲੱਗ ਜਵੇ ਫੈ ਤਾਂ ਸੁਣਦੇ ਵਿਚਾਲੇ ਕੀ ਹੈ ਹੈ ਜਾਂ ਸੁਣੋ ਮਿਲਦੇ ਨੇ ਉਹ ਜਦਾ ਕਿਹੜੀ ਹੈ ਪੁਕਾਟ ਹੈ ਉਹ ਤੇ ਕਿਨਾਕ ਫਰਕ ਹੈ ਉਹਨਾਂ ਦਾ ਆਪਸ ਵਿੱਚ ਹੀ ਜਿੰਨਾ ਫਰਕ ਹੈ ਬਾਰਡਰ ਜਿੱਥੇ ਦੋ ਦੇਸ਼ਾਂ ਨੇ ਮਿਲਦੇ ਨੇ ਕਿੰਨਾ ਫਰਕ ਹੁੰਦਾ ਹੈ ਉੱਤੇ ਫਰਕ ਹੁੰਦਾ ਵੀ ਹੈ ਫਰਕ ਹੁੰਦਾ ਵੀ ਹੈ ਜੀ ਕਿਤਨੀ ਜ਼ਮੀਨ ਖਤਮ ਹੋਈ ਉਹਦੀ ਸ਼ੁਰੂ ਹੋ ਜਾਂਦੀ ਹੈ ਫਰਕ ਇਹਦੇ ਨਾਲ ਪਪੀਰੀ ਦੇ ਪੱਤੇ ਜਨਾ ਫਰਕ ਇਹ ਪਪੀਰੀ ਦਾ ਪੱਤ ਰੱਖ ਵੀ ਫਰਕ ਹੈ ਬਸ ਦੋਵੇਂ ਮਿਲੇ ਹੋਏ ਨੇ ਉੱਥੇ ਇਸ ਕਰਕੇ ਸੈਸ ਆਪਸ ਵਿੱਚ ਮਿਲੇ ਹੋਏ ਨੇ ਇਹ ਕਰਮਾਂ ਮਿਲੇ ਰਹਿਣ ਨੇ ਮਿਲੇ ਹੋਏ ਨੇ ਵਿੱਚ ਫਰਕ ਪਰਫਦਾ ਹੀ ਪੜਦਾ ਦੀ ਪੀਤ ਹੈ ਉੁੱਧੀ ਕਹਿੰਦੀ ਐ ਤਨਪੇਰ ਦਾ ਇੱਕ ਪੀਤ ਕਰਾ ਦੇ ਪਰ ਭਰਮਦਾ ਹੀ ਪੜਦਾ ਉਹ ਵੀ ਭਰਮਦਾ ਹੀ ਕਰਕੇ ਉਹ ਦਸਮਗੋੜ ਚ ਚਲਿਆ ਜਾਂਦਾ ਏਥੇ ਘਰ ਚਲਿਆ ਜਾਂਦਾ ਉਹ ਦਸਮਗੋੜ ਬਾਹਰ ਅੰਦਰ ਹੈ ਹਾਂਜੀ ਸੋ ਘਟ ਛਾੜ ਅਵਕਟ ਖਤਤਾਵਾ ਉਹ ਘਟ ਛੱਡ ਕੇ ਹਿਰਦਾ ਛੱਡ ਕੇ ਆਪ ਘਟ ਚ ਕਦੋਂ ਜਾਂਦਾ ਇਹ ਆਪ ਘਟ ਹੈ ਕਦੋਂ ਆਪ ਘਟ ਨੇ ਕਦੋਂ ਪਤਾ ਹੀ ਨੇ ਕਿੱਥੇ ਖਤਮ ਹੋ ਨਾਲ ਖਤਮ ਜੁੜਦਾ ਫਿਰ ਕੱਚੇ ਪਾਡੇ ਨਾਲ ਖਤਮ ਜੁੜਦਾ ਜਿਹਨੂੰ ਮੈਨ ਮਿਲ ਗਿਆ ਕੱਚੇ ਘਰ ਚ ਕਦੋਂ ਜਾਂਦਾ ਕੱਟਨੇ ਫਸੇ ਰਹੂ ਪਤਾ ਕਦੋਂ ਲੈ ਪੈਣਾ ਕੱਚੇ ਕੱਲ ਸੋ ਘਟ ਜੇ ਕੋਈ ਉਹ ਘਟ ਛੱਡ ਜਵੇ ਜੇ ਕੱਟ ਕੋਈ ਪਾ ਲਵੇ ਹਰਦਾ ਜੇ ਕੋਈ ਨਿਤਕਾਰ ਚ ਚਲਿਆ ਜਾਵੇ ਦਸਮਦਾਰ ਚ ਜਾ ਬੜੇ ਉਹ ਝੱਟ ਫੇਰ ਕਦੀ ਜਾਂਦਾ ਕਹਿੰਦੇ ਹੋ ਉਹ ਮੁੜ ਕੇ ਅਬ ਕੱਟ ਗਿਆ ਸੋ ਕੱਟ ਛਾੜ ਅਬ ਕੱਟ ਕੱਟ ਧਾਵਾ ਅਬ ਕੱਟ ਕੱਟ ਧਾਵਾ ਕਦੋਂ ਅਬ ਕੱਟ ਕੋਈ ਗਿਆ ਅਜੇ ਤੱਕ ਕੋਈ ਨਹੀਂ ਜਾਂਦਾ ਫਿਰ ਜਿਹੜਾ ਨਿਤਕਾਰ ਚ ਚਲਿਆ ਗਿਆ ਹਰਦੇ ਵਿਚੀਰ ਨਵਾਸ ਹੋ ਗਿਆ ਮੰਦਾ ਚੁਰਤ ਦਾ ਧਾਮ ਦਾ ਉਹ ਫਿਰ ਵੀ ਤੇ ਕੁੜੀ ਜਾ ਕੇ ਨੀਂਦਾ ਉਹਦੋਂ ਨਹੀਂ ਪੈਦਾ ਫਿਰ ਸੋ ਕੰਟ ਛਾੜ ਜੇ ਕੋਈ ਇਹ ਕੰਟ ਨੂੰ ਛੋਹ ਉਹ ਉਹ ਘਟ ਦੇ ਨਾਲ ਸੋ ਵਿਅਕਤੀ ਨਾਲ ਲੱਗਿਆ ਹੋਇਆ ਸੋ ਘਟ ਹੈ ਨਾ ਕਿਉਂਕਿ ਕਟਿਕ ਸੋ ਘਟ ਛਾੜ ਹੈ ਬਾਏ ਦਾ ਦਾ ਜੇਲਾ ਜੀ ਨੇ ਕੱਟਾਲਿਆ ਜੁਬਾ ਉਹ ਆਦਮੀ ਫੇਰ ਉਹ ਕੱਟ ਛੱਡ ਕੇ ਅੰਦਰ ਬਾਹਰ ਕੱਟ ਨਹੀਂ ਜਾਂਦਾ ਬਾਹਰ ਲੈ ਕੱਟ ਰੋ ਆਪ ਕੱਟ ਕੇ ਸੋ ਘਟਾ ਸਿੰਗੂਲਰ ਹੈ ਨਾ ਫੇਰ ਉਹ ਖਾਸ ਘਟਾ ਨਹੀਂ ਆਪਕਾ ਤਾਂ ਬਾਹਰ ਲਾ ਇਹ ਅੰਦਰ ਲਾ ਹੈ ਜੀ ਆਪ ਘਟ ਬਾਹਰ ਲੈ ਸੋ ਘਟ ਛਾੜ ਆਵ ਕੱਟ ਕਤ ਕਦੋਂ ਆਉਂਦਾ ਉਹ ਬਾਹਰ ਠੀਕ ਹੈ ਜੀ ਇਹ ਸੀਗਾ ਭਗਤ ਕਬੀਰ ਜੀ ਦਾ ਉਪਦੇਸ਼ ਜੀ ਹੁਣ ਜੀ ਗੁਰੂ ਨਾਨਕ ਸਾਹਿਬ ਦਾ ਜੀ ਹਾਂ ਜੀ ਘੱਗੇ ਕਾਲ ਸੇਵਕ ਜੇ ਕਾਲ ਹੈ ਸ਼ਬਦੀ ਗੁਰੂ ਕ ਲਾਗ ਰਹਿ ਜੇ ਸੇਵਕ ਕਾਲ ਕਮਾਈ ਕਰ ਲਵੇ ਸੇਵਕ ਜੇ ਹੈ ਕੋਈ ਕਾਲ ਕਮਾਈ ਕਰ ਲਵੇ ਸ਼ਬਦ ਵਿਚਾਰ ਕਰ ਲਵੇ ਸੰਤੋਖ ਪ੍ਰਾਪਤ ਕਰ ਲਵੇ ਫਿਰ ਗੁਰੂ ਸ਼ਬਦ ਦੇ ਨਾਲ ਧਿਆਨ ਜੋੜ ਕੇ ਰੱਖਦਾ ਹੈ ਉਥੇ ਆਸ ਦੇ ਵਿੱਚ ਬੈਠਾ ਰਹਿੰਦਾ ਜਦ ਮਣੂ ਜਦ ਮੜ ਜੂ ਉਹਦੀ ਆਸ ਵਿੱਚ ਬੈਠਦਾ ਫਿਰ ਨਾ ਮਿਲੂਗਾ ਮੈਨੂੰ ਜੇ ਕਮਾਈਂ ਘਾਲ ਘਾਲ ਲਵੇ ਉਤੇ ਬਾਅਦ ਦੀ ਗੱਲ ਹੈ ਫਿਰ ਇਹ ਚਾਲ ਲਵੇ ਸੰਤੋਖ ਆਜਵੇ ਉਤੇ ਬਾਅਦ ਫਿਰ ਐ ਕਰਦਾ ਉਹ ਉਹ ਅੰਦਰੇ ਘੱਟ ਕੇ ਰਹਿੰਦਾ ਕਹਿੰਦਾ ਮਤਲਬ ਹੈ ਬਾਅਦ ਨਹੀਂ ਹੁੰਦਾ ਫਿਰ ਉਹ ਸ਼ਬਦ ਗੁਰੂ ਖੈ ਲਾਗ ਰਹਾ ਗੁਰੂ ਸ਼ਬਦ ਦੇ ਨਾਲ ਉਹਦੀ ਆਸ ਤੇ ਬੈਠਾ ਰਹਿੰਦਾ ਨਹੀਂ ਸ਼ਬਦ ਦੁਆਰਾ ਗੁਰੂ ਜੀ ਧਿਆਨ ਲੱਗਦਾ ਸ਼ਬਦ ਨਹੀਂ ਗਿਆਨ ਦੁਆਰਾ ਗੁਰੂ ਜੀ ਧਿਆਨ ਲੱਗਣਾ ਫਿਰ ਸ਼ਬਦ ਦੁਆਰਾ ਗਿਆਨ ਮਿਲ ਗਿਆ ਆਪਾਂ ਨੂੰ ਸ਼ਬਦ ਦੁਆਰਾ ਜੋ ਲੈਣਾ ਸੀ ਰੜਕੇ ਲੈ ਲਿਆ ਮੱਖਣ ਗਿਆਨ ਆ ਗੁਰੂ ਕੇ ਲਾਗ ਰਹੇ ਸ਼ਬਦ ਦੁਆਰਾ ਗੁਰੂ ਕੇ ਨਾਲ ਲਾਗ ਰਹੇ ਉਪਦੇਸ਼ ਲੈ ਕੇ ਜੋ ਗਿਆਨ ਮਿਲਿਆ ਉਹਦੇ ਨਾਲ ਫਿਰ ਗੁਰੂ ਨਾਲ ਜੁੜਿਆ ਜਾਂਦਾ ਕੀ ਕਿ ਸੱਚਖੰਡ ਨਾਲ ਜੁੜ ਜਾਂਦਾ ਹੈ ਜੀ ਹਾਂ ਬੁਰਾ ਭਲਾ ਜੇ ਸਮ ਕਰ ਇਨ ਬਿਧੀ ਸਾਹਿਬ ਰਮਤ ਰਹਿ ਬੁਰਾ ਭਲਾ ਜਿਹੜਾ ਉਹਨੂੰ ਸਮ ਕਰਕੇ ਹੀ ਜਾਣਦਾ ਆਪਣਾ ਬੁਰਾ ਹੋ ਜਾਏ ਭਲਾ ਹੋ ਜਾ ਕੋਈ ਫਰਕ ਨਹੀਂ ਉਹਨੂੰ ਸਮ ਜਾਣਾ ਬਿਧੀ ਸਾਹਿਬ ਰਮਤ ਰਹਿ ਆ ਇਸ ਬਿਧੀ ਨਾਲ ਬੁਰਾ ਭਲਾ ਨੂੰ ਜੇ ਬਰਾਬਰ ਜਾਣੇ ਸਾਹਿਬ ਰਮਤ ਰਹਿ ਸਾਹਿਬ ਨਾਲ ਜੁੜਿਆ ਰਹਿੰਦਾ ਸਾਹਿਬ ਚ ਲੀਨ ਹੋਇਆ ਰਹਿੰਦਾ ਆਪਣੇ ਮੂਰਤ ਦੇ ਵਿੱਚ ਲੀਨ ਹੋਇਆ ਰਹਿੰਦਾ ਠੀਕ ਹੈ ਜੀ ਇਹ ਉਪਦੇਸ਼ ਹੈ ਜੀ ਪੱਤੀ ਮਹਨਲਾ ਪਹਿਲਾ ਚੋਂ ਇਹਦੇ ਚ ਅੱਧੀ ਪੰਕਤੀ ਹੈ ਤੀਸਰੇ ਪਾਸ਼ਾ ਨੇ ਜੋ ਉਪਦੇਸ਼ ਦਿੱਤਾ ਹੈ ਜੀ है जी, ਨੌਵੀਂ ਪੌੜੀ ਹੈ ਜੀ ਆਸਾ ਮਹੱਲਾ ਤੀਜਾ ਜੋ ਪੱਤੀ ਹੈ ਉਹਦੇ ਵਿੱਚ ਉਹ ਹੈ ਜੀ ਪੂਰੀ ਪੂਰੀ ਪੌੜੀ ਨਾ ਤੂੰ ਦਲਿਆ ਭੱਗੇ ਰਬ ਦੇਸ਼ ਹੈ ਜੀ ਭੱਗਿਆ ਘਰ ਘਰ ਫਿਰੇ ਤੂੰ ਮੂੜੇ ਤਾਂ ਹੀ ਘਰ ਘਰ ਤੋੜਿਆ ਫਿਰਦਾ ਘਰ ਘਰ ਤੋੜੇ ਫਿਰਦੇ ਨੇ ਤਾਮਸ ਤੈਨੂੰ ਮਾਇਆ ਦੀ ਭੁੱਖ ਹੈ ਤਮਉ ਗੁੜੀ ਤਾਮਸ ਜਲਿਓ ਮੂੜੇ ਤੂੰ ਤਮਾਂ ਦੇ ਵਿੱਚ ਜੜ ਗਿਆ ਤੈਨੂੰ ਮਾਇਆ ਕ੍ਰਿਸ਼ਨਾਂ ਦੀ ਅੱਗ 'ਚ ਜੜਦਾ ਹੈ ਤੇਰੇ ਅੰਦਰ ਹੈ ਤਾਂ ਤੇਰਾ ਹਿਰਦਾ ਪ੍ਰਿਸ਼ਟ ਹੋ ਗਿਆ ਪ੍ਰਿਸ਼ਟ ਹੋ ਗਿਆ ਹਿਰਦਾ ਤੇਰਾ ਪਉਂਤੰਤੀਆ ਹਲਦਾ ਦੇਗਾ ਏਕ ਕਗੜੀ ਕਗਹਿ ਘਰੀ ਘਰੀ ਫਿਰੇ ਤੂੰ ਮੁੜੇ ਦੱਦਾ ਦਾਨ ਨਾ ਤੁਧ ਲਿਆ ਘਰ ਘਰ ਤੁਰਿਆ ਫਿਰਦਾ ਮਾਇਆ ਦੇ ਵਾਸਤੇ ਮੰਗਤਾ ਦਾਨ ਨਾ ਤੁਧ ਲਿਆ ਤਾਂ ਜਿਹੜਾ ਦਾਨ ਉਹਨੇ ਦਿੱਤਾ ਸੀ ਅੰਤਰਾਤਮਾ ਦੀ ਵਜ੍ਹਾ ਤੈਨੂੰ ਦੇ ਰਹੀ ਸੀ ਇਹ ਨੇ ਜੋ ਤੈਨੂੰ ਦਿੱਤਾ ਸੀ ਦਾਨ ਭੇਜਿਆ ਹੋਊ ਤਾਂ ਤਾਂ ਲਿਆ ਨਹੀਂ ਆ ਮੰਗਤਾ ਬਣਿਆ ਫਿਰਦਾ ਲੋਕਾਂ ਤੋਂ ਇਹ ਇਹਨੂੰ ਦਾਨ ਕਹਿੰਦਾ ਹੈ ਦਾਨ ਹੈ ਕਿਨੂੰ ਧਨ ਮੰਨ ਲਿਆ ਇਹਨੂੰ ਦਾਨ ਮੰਨ ਲਿਆ ਇਹਦੇ ਖਤਰ ਕਰਿਆ ਫਿਰ ਫਿਰ ਅਪਨਾਂ ਕੋ ਤ੍ਰਿਸ਼ਨਾ ਹੈਗੀ ਹੈ ਤੇਰੇ ਅੰਦਰ ਫਿਰਦਾ ਤੇਰਾ ਸ਼ੁੱਧ ਨਹੀਂ ਹੈ ਅਸ਼ੁੱਧ ਫਿਰਦੇ ਨੇ ਪੰਡਿਤ ਫਿਰਦਾ ਸੀ ਉਹਦੇ ਵੱਲ ਕਰ ਇਸ਼ਾਰਾ ਹੈ ਜਿਹੜੇ ਸੰਤ ਫਿਰਦੇ ਪੰਡਿਤ ਦੀ ਪੰਡਿਤ ਨੇ ਦੂਏ ਮਾਲਾ ਪੰਡਿਤ ਨੇ ਕੱਪੜੇ ਪਾ ਲਏ ਪੰਡਿਤ ਹੋ ਗਿਆ ਸੀ ਬਦਨਾਮ ਫਿਰ ਬਣ ਗਿਆ ਸੰਤ ਉਹ ਕੱਪੜੇ ਪਾ ਕੇ ਮਰੀਤਾ ਜੀ ਕੋ ਬਣਾ ਲਈ ਠੀਕ ਹੈ ਜੀ ਦੱਦਾ ਦਾਨ ਨਾਂ ਤੋਂ ਲਿਆ ਉਹ ਜਿਹੜਾ ਦਾਨ ਸੀ ਦਿੱਤਾ ਦਾਨ ਦਿੱਤਾ ਸੀ ਦੱਦਾ ਦਾਤਾ ਇੱਕ ਆ ਦੇ ਰਹੀ ਸੀ ਉਹ ਨਹੀਂ ਤਾਂ ਉਹ ਵੱਲ ਮੰਦੀ ਉਹਦੇ ਨਾਲ ਮੇਲ ਖਾਣ ਵਾਲੀ ਗੱਲ ਹੈ ਉਹ ਨਹੀਂ ਲਈ ਹੈ ਸੱਚ ਨਹੀਂ ਲਿਆ ਹੈ ਮਾਇਆ ਲਈ ਠੀਕ ਹੈ ਜੀ ਹੁਣ ਪੰਜਵੇਂ ਬਾਵਨ ਅਖਰੀ ਜੋ ਉਪਦੇਸ਼ ਦਿੰਨੇ ਜੀ ਪੌੜੀ ਢੱਗਾ ਘਾ ਮਨਾ ਇਹ ਬਿਨ ਹਰ ਦੂਸਰ ਨਾ ਹੈ ਢੱਗਾ ਕਾਲੋ ਲੋ ਮਨਾ ਹੈ ਬੰਦੇ ਵਿੱਚ ਮੈਸੇਜ ਪਹੁੰਚਾ ਦਿਓ ਬੰਦੇ ਅੰਦਰ ਪਹੁੰਚਦਾ ਕਰ ਦਿਓ ਵਿਸ਼ਵਾਸ ਪਹੁੰਚਦਾ ਕਰ ਦਿਓ ਕਿ ਦੋ ਨਾਲ ਦੂਸਰ ਨਾ ਹੈ ਹਰ ਤਦ ਨਾਲ ਦੂਜਾ ਹੋਰ ਕੋਈ ਹੈ ਹੀ ਨਹੀਂ ਮੈਂ ਹਰ ਜੀ ਬਸ ਹੋਰ ਕੋਈ ਨਹੀਂ ਹੈ ਘਟ ਦੇ ਵਿੱਚ ਹਰੇ ਹੈ ਠੀਕ ਹੈ ਜੀ ਨਾ ਹੋਆ ਮੈਂ ਹੋਵਣਾ ਜਦਕੱਤ ਉਹੀ ਸਮਾਏ ਨਾ ਕੋਈ ਹੋਇਆ ਕਦੇ ਅੰਦਰ ਦੂਜਾ ਨਾ ਹੋਣਾ ਗਾਂ ਵਾਸਤੇ ਹਾਂ ਨਹੀਂ ਰਹਿਣਾ ਇਸ ਦੇ ਵਿੱਚ ਉਹਦੀ ਜਗ੍ਹਾ ਉਹਦਾ ਹੀ ਘਰ ਹੈ ਜਦ ਵਿੱਚ ਸਮਾਏਗਾ ਇੱਥੇ ਹੀ ਸਮਾਉਣਾ ਪੈਣਾ ਕੁੱਬਲਾ ਜਿੱਥੇ ਮਰਜੀ ਜਦਕੱਤ ਇੱਥੇ ਹੀ ਸਮਾਏ ਜਦਕੱਤ ਸਮਾਉਣਾ ਇੱਥੇ ਸਮਾਉਣਾ ਪੈਣਾ ਕੁੱਬਲਾ ਜਿੱਥੇ ਮਰਜੀ ਸਮਾ ਸਕਦੇ ਨਹੀਂ ਸਕਦਾ ਕਾ ਜਰ ਕਾ ਨਹੀਂ ਸਮਾਏਗਾ ਐਸੇ ਸਮਾਏਗਾ ਨਾ ਕੋਈ ਹੋਇਆ ਹੋਰ ਤੈਨੂੰ ਸਮਾਉ ਲੈਣ ਵਾਲਾ ਨਾ ਹੋਣਾ ਕਿਸੇ ਨੇ ਬਾਣੀ ਫਾੜੀ ਤੇਰੀ ਤੇ ਤੇ ਮਰਜੀ ਫੱਲਾ ਮੂਰਤੀਆਂ ਜਿਹੜੀਆਂ ਮਰਜੀ ਪੂਜ ਲੈ ਘੂਲੈ ਤੋ ਮਨ ਜੋ ਆਵੇ ਸਰਨਾ ਨਾਮ ਤਤ ਚਲ ਮੈਂ ਚਰਨਾ ਜਦ ਮਨ ਕੋਲਦਾ ਕਿ ਸਮਾ ਜਾਂਦਾ ਮਨ ਐ ਘੜ ਜਾਂਦਾ ਜਿਵੇਂ ਕੋਈ ਪਤਾਸਾ ਕੋਲ ਜਾਂਦਾ ਪਤਾਸੇ ਦਾ ਵजूद ਹੈ ਜੇ ਪਾਣੀ ਦੀ ਭਾਈ ਜਾਂਦਾ ਹਰਦੇ ਜੇ ਛਲਨਾ ਜੇ ਮਨੋ ਦੇ ਝਰਕੇ ਸਮਾ ਜਾਂਦਾ ਕੋ ਜਾਂ ਪੁੰਨਾ ਚੜਨਾ ਆ ਚੜਨ ਬਦਲ ਜਾਂਦਾ ਫਿਰ ਆ ਚੜਨ ਇਹ ਜਾਂ ਨਹੀਂ ਰਹਿੰਦਾ ਜਹ ਜਹ ਹੁਣ ਪੁੰਨਾ ਹੈ ਚੜਨਾ ਨਾ ਦੁਬਾਰਾ ਪੁੰਨ ਚੜਨਾ ਤਤ ਤਮਾ ਹੈ ਜਿਹੜਾ ਇਹ ਕਾਲ ਯੁਗ ਦੇ ਵਿੱਚ ਇਹ ਤੇਰਾ ਆਹਾਰ ਬਣ ਜਾਂਦਾ ਚੜਨਾ ਚਲਨਾ ਫਿਰ ਖਾਣ ਦੀ ਸੈਂਸ ਵਿੱਚ ਆਊਗਾ ਸੱਚ ਖਾਣਾ ਸੱਚ ਪਹਿਨਣਾ ਹੋ ਜਾਂਦਾ ਹੈ ਇਹ ਤੇਰਾ ਆਚਰਣ ਬਣ ਜੂਗਾ ਪੁੰਨ ਆਚਰਣ ਹੈ ਜੀ ਆਹ ਇਹ ਤੇਰਾ ਸੱਚ ਖਾਣਾ ਸੱਚ ਪਹਿਨਣਾ ਆਚਰਣ ਬਣ ਜੂਗਾ ਤੇਰੀ ਖੁਰਾਕ ਬਣ ਜੂ ਸੱਚ ਠੀਕ ਹੈ ਜੀ ਕਾਲ ਕਾਲ ਅਨੇਕ ਪਛਤਾਵੈ ਬਿਨ ਹਰ ਭਗਤੀ ਕਹਾ ਥਿਤੀ ਪਾਵੈ ਹੋਰ ਕਾਲਗਮਾਈ ਕਰਦੇ ਕਰਦੇ ਮਾਲਾ ਫੇਰ ਤੇ ਫੇਰਦੇ ਸਮਾਦੀ ਲਾਉਂਦੇ ਲਾਉਂਦੇ ਸਾਰੇ ਥੱਕ ਜਾਂਦੇ ਨੇ ਸਾਰੀ ਉਹ ਨਮੀ ਜਾਂਦੀ ਹੈ ਥਿਤੀ ਪਾਵੈ ਮਨ ਦਾ ਟਿਕਾਉ ਨਹੀਂ ਹਰ ਭਗਤੀ ਤੋਂ ਬਿਨਾ ਹਰ ਦੇ ਨਾਲ ਜੁੜੇ ਤੇ ਬਿਨਾ ਹਰ ਨੂੰ ਜਾਣੇ ਤੇ ਬਿਨਾ ਜਾਣ ਕੇ ਉਹਦੇ ਨਾਲ ਜੁੜੇ ਤੇ ਬਿਨਾ ਮਨ ਨਹੀਂ ਠਹਿਰ ਸਕਦਾ ਜਿੰਨਾ ਮਰਜ਼ੀ ਤਪ ਕਰੀ ਜਾਓ ਜਿੰਨਾ ਮਰਜ਼ੀ ਜਪ ਕਰੀ ਜਾਓ ਜਿੰਨੀ ਮਰਜ਼ੀ ਮਾਲਾ ਫੇਰ ਲਓ ਜਿੰਨੀ ਮਰਜ਼ੀ ਸੁਬਾਦੀ ਲਾ ਲਓ ਜੋ ਮਰਜ਼ੀ ਕਰ ਲਓ ਮਹਾਰਸ ਅੰਮ੍ਰਿਤ ਤਹ ਪੀਆ ਨਾਨਕ ਹਰ ਗੁਰ ਜਾ हां हरगोविंद ने यूं दत्ता है महारास नामरास ओने खोल के पीता है फिर ओने यार पूरा विचार के पीता है यूं कुर्बानी च पाके मिला के देता ओने फिर विचार विचार के अपना आपा ही विच खोल के पीता आप ए दे विच ही खुल गया रस ਆਪਣੇ ਰਸ ਦੇ ਵਿੱਚ ਆਪ ਕੋਲ ਕੇ ਆਪ ਹੀ ਪੀ ਗਿਆ ਛਰ ਦੇ ਵਿੱਚ ਹੀ ਚਲਾ ਗਿਆ ਸਾਰਾ ਢੁਲ ਢੁਲ ਕੇ ਮੰਦਾ ਫਟਵੇ ਖਤਮ ਹੋ ਗਿਆ ਹੋਲ ਮਹਾਰਸ ਅੰਮ੍ਰਿਤ ਪੀਆ ਨਾਨਕ ਹਰ ਗੁਰ ਜਾ ਕੋ ਦਿਆ ਹਰ ਗੁਰ ਨੇ ਜਿਹਨੂੰ ਦਿੱਤਾ ਗੁੱਦੀ ਨੇ ਜਿਹੜਾ ਮਾਨਾ ਨਾ ਮਨ ਵਿੱਚੇ ਖੋਲ ਕੇ ਪਲਾਤਾ ਇਹ ਪਵੇ ਜੀ ਜੋ ਅੰਮ੍ਰਿਤ ਹੈਗਾ ਜਿਹਨੂੰ ਗੁਰਮਤ ਅੰਮ੍ਰਿਤ ਮੰਨਦੀ ਹੈ ਹਰ ਗੁਰ ਤੋਂ ਪ੍ਰਾਪਤ ਹੁੰਦਾ ਹੈ ਆ ਹਰਗੋਰਤੋ ਪ੍ਰਾਪਤ ਨਾ ਰਾਸਾ ਹੋ ਗਿਆਨ ਰਾਸਾ ਹੋ ਠੀਕ ਹੈ ਤੇ ਜਿਹੜੀ ਆਪਾਂ ਨੂੰ ਪੰਜ ਪਿਆਰੇ ਦਿੰਨੇ ਆ ਨਾਲੇ ਉਹ ਕਿਤੇ ਹਰਗੋਰਨ ਦੇ ਦਿੱਤਾ ਹਰਗੋਰਨ ਦੇ ਦਿੱਤਾ ਕੁਰਬਾਨੀ ਦਿੱਤਾ ਉਹ ਸਮਝ ਲਓ ਉੱਤੇ ਠੀਕ ਹੈ ਜੀ ਇੱਥੇ ਨਾਲੇ ਤਾਂ 20ਵੀਂ ਪੌੜੀ ਦੀ ਸਮਾਪਤੀ ਹੈ ਜਿਹਦੇ ਵਿੱਚ ਕਿੱਕ ਅੱਗੇ ਅੱਖਰ ਦਾ ਉਪਦੇਸ਼ ਪੰਜਵੇਂ ਪਾਸ਼ਟਾਨ ਨੇ ਸਾਨੂੰ ਦਿੱਤਾ ਸੀ ਆਮ ਜਿਹੜੀ ਗੱਲ ਚਾਰਾਂ ਪੌੜੀਆਂ ਚੋਂ ਆਪਾਂ ਨੂੰ ਪਤਾ ਲੱਗਦੀ ਐ ਕਿ ਕਾਲ ਕਮਾਈ ਕਰਕੇ ਉਹ ਅੰਮ੍ਰਿਤ ਆਪਾਂ ਪੀਣਾ ਹੈ ਜੀ ਜੀ ਤੇ ਇਹੀ ਜਿਹੜਾ ਅੰਮ੍ਰਿਤ ਨੇ ਜਿਹੜਾ ਦਿੱਤਾ ਤੇ ਉਹੀ ਅੰਮ੍ਰਿਤ ਜੀ ਪੀ ਲਿਆ ਕਬੀਰ ਜੀ ਕਹਿੰਦੇ ਸੋ ਘਟ ਛਾੜ ਅਵ ਕਟ ਤਾਵਾ ਉਹ ਵਾਪਸ ਨਹੀਂ ਆਉਂਦਾ ਹੈ ਨੀ ਕਰਨ ਹੁਣ ਵਾਪਸ ਆਨੇ ਥੋੜਾ ਖੰਦਾ ਰਿਆ ਦੇਖ ਲਿਆ ਯੇ ਗੁਰਨਾਮ ਸਾਹਿਬਿਕ ਨੇ ਅੱਗੇ ਕਾਲ ਸੇਵਕ ਦੇ ਕਰ ਲੈ ਸ਼ਬਦੀ ਗੁਰੂ ਕੇ ਲਾਗ ਰਹਿ। ਇਹ ਅੰਮ੍ਰਿਤ ਪੀਣਾ ਹੀ ਗੁਰੂ ਕੇ ਲਾਗ ਰਹਿ ਹੈ ਸ਼ਬਦ ਨਾ ਅੰਮ੍ਰਿਤ ਪੀਣਾ। ਵੇਖੋ ਗੁਰਬਾਣੀ ਅੰਮ੍ਰਿਤ ਇੰਗਾ ਵਰਤੀ ਹੈ। ਠੀਕ ਹੈ ਜੀ। ਆਪਾਂ ਕਰਦੇ ਹਾਂ ਕਿ ਸੰਗਤਾਂ ਜਿਹੜੀਆਂ ਇਹ ਸੁਣ ਕੇ ਵਿਚਾਰਵਾਨ ਹੋਣ। ਹਰਗੁਰ ਵਾਲਾ ਮਹਾਰਾਜ ਅਮਰ ਜਿਹੜਾ ਹੈ ਉਹ ਪੀਣ ਇਥੇ ਫਿਰ ਅਭੀ ਕੱਗੇ ਅੱਖਰ ਦੀ ਉਪਦੇਸ਼ ਦੀ ਸਮਾਪਤੀ ਹੈ